ਲੋਕ ਜੀ ਜੰਤ ਕੇ ਠਾਗੜਾ ਆਪੇ ਵਰਤਨ ਹਾਰ ਕੇ ਇੱਕੋ ਤਸਰਿਆ ਦੂਜਿਆ ਕਹਿ ਜੀ ਜੰਤ ਕੇ ਠਾਗੜਾ ਜਿਹੜਾ ਕੋਲੋਂ ਬੜਾ ਜੀ ਜੰਤ ਦਾ ਠਾਗੜਾ ਆਪੇ ਵਰਤਨ ਹਾਰ ਤੂੰ ਹੀ ਹੈ ਸੰਸਾਰ ਦੀ ਭਾਇਆ ਤੂੰ ਵੀ ਤੂੰ ਹੀ ਵਰਤਨ ਸੰਸਾਰ ਜੀ ਵੀ ਤੂੰ ਵਰਤਨਾ ਹੈ ਤੋਂ ਪਰੇ ਵੀ ਤੂੰ ਹੀ ਬਿਮਾਰ ਹੋ ਕੇ ਮਰੀਜ਼ ਆਂ ਤੰਦਰੁਸਤ ਹੋ ਕੇ ਡਾਕਟਰ ਜੇ ਤੰਦਰੁਸਤ ਰਸタル ਤੱਕ ਆਪਰੇ ਡਾਕਟਰ ਦੇ ਕੋ ਪਾਊਡਰ ਠੀਕ ਹੈ ਜੀ ਤੇ ਕੰਪਾਊਂਡਰ ਦੇ ਜਾਂ ਕੋ ਪਾਊਡਰ ਕੋ ਜੇ ਡਾਕਟਰ ਦੀ ਕੰਪਾਊਂਡਰ ਨਾਲ ਹੁੰਦਾ ਹੈ ਨਾ ਅਸ਼ਟਧਰ ਕੰਪਾਊਂਡਰ ਲਿੰਦੋ ਉਹ ਲੈ ਜੀ ਇਹਨੇ ਕੰਪਾਊਂਡਰ ਦੇ ਕੋ ਪਾਊਡਰ ਕੋ ਦੋ ਜਿਹੜੇ ਬੋਲਦਾ ਇਹ ਦੋ ਉਹ ਤਾਂ ਪਾਊਡਰ ਦੇ ਕੋ ਹੁੰਦਾ ਨਾ ਜਾਂ ਫਿਰ ਬਲੀ ਦੀ ਕੋ ਪਾਊਡਰ कौन व्रत है संसार के बिच में संसार से बाहर है अब पर व्रत है भाई नानक एको पसरेया दूजा कह दृष्टा नानक एको पसरेया एको ही है पूर्ण ब्रह्म सी जड़ा जो पूर्णते ब्रह्मते थलया के ब्रह्म बन गया ब्रह्म रह गया कुछ ज्ञान गवा लिया और कुछ गुण ਜਾਨਤਨੀ ਗੁੰਮ ਗਵਾਲੇ ਉਹ ਗੁਣਾ ਨੂੰ ਠੀਕ ਕਰਵਾ ਸੇ ਜਿਹੜੇ ਗਵਾਲੇ ਨੁਕਸਾਨ ਕਰ ਲੈ ਗੋੜ ਉਹ ਗੁਣਾ ਨੂੰ ਦੀ ਪੂਰਤੀ ਵਾਸਤੇ ਮੇ ਜੋ ਕਮੀ ਪਾਈ ਕੀ ਕਮੀ ਦੀ ਪੂਰਤੀ ਵਾਸਤੇ ਸੰਸਾਰ ਜਲੂ ਲੈ ਹੈ ਤੇਰਾ ਲਹਾਲਾ ਨ ਆਇਆ ਜਿਹੜਾ ਲਹਾਲਾ ਨਹੀਂ ਗੋੜ ਦਲ ਕੇ ਉਹ ਗੁਣ ਠੀਕ ਕਰ ਅਸਪਦੀ ਆਪ ਕਥੇ ਆਪ ਸੁਣਨੇ ਔਰ ਆਪੇ ਇੱਕ ਆਪ ਵਿਸਥਾਰ ਆਪ ਕਥੇ ਆਪ ਸੁਣਨੇ ਹਾ ਗਾਤਾ ਕੌਣ ਕਥਨ ਕੌਣ ਦਾ ਵੈਲਾ ਬੋਲਦਾ ਨਾ ਬੋਲਦਾ ਜਿਹੜਾ ਉਹ ਕਥੇ ਕਥਨ ਕਰਦਾ ਸੁਣਦਾ ਕੌਣ ਸੁਣਦਾ ਵੀ ਆਪੇ ਜੇ ਦੂਏ ਚ ਸੁਣਦਾ ਜਾਂ ਦੂਜਾ ਹੈ ਇਹਦੀ ਸੁਣਦਾ ਆਪੇ ਹੈ ਉੱਤੋਂ ਕੀ ਚਲਿਆ ਦੂਜਾ ਕਨ ਦੇ ਸਾਰੇ ਕੋ ਪਤਿਆ ਨਾ ਗੇ ਕੋ ਪਤਿਆ ਕੀ ਕਹਿੰਦਾ ਜੇ ਲਾ ਨਹੀਂ ਹੁੰਦਾ ਨਾ ਕੋ ਗੁਰੂ ਹੈ ਨਾ ਕੋ ਜੇਲਾ ਅੱਛਾ ਕੱਟੀ ਹੈ ਮਾਰੀ ਤਲਵਾਰ ਵੱਢ ਕੇ ਸਾਰੀ ਸੱਤ ਕੋ ਟੱਕ ਨਾ ਸਾਰੇ ਮਾਰੇ ਜਦ ਇੱਕ ਰਹੀ ਤਨਾਰ ਕੋ ਸੱਧ ਰਹਿ ਤੇਰੇ ਬਾਗ ਆ ਕੱਟਿਆ ਛੇ ਉਸ ਤੋਂ ਹੋਰ ਲੈਂਦਾ ਉਹ ਕਹਿ ਕੇ ਕਟਰਾ ਸੀ ਗੁਰੂ ਜੇਲਾ ਜੇ ਆਪ کتے آپ سننے ہا تے سنتا پھر کون دے گوجہ گئے نہیں کوئی ہاں وہ بھی سننا تے گوجہ گئے نہیں کوئی کیلا اوپر کم ہو گیا بھائی بولتی بند سعودی بولے کون بولدا اے آپ ਇਹ ਦੂਜਾ ਕਦ ਬੇਸ਼ਾਰਦਾ ਜਾਂ ਜਵਾਬ ਦੇ ਆਏ ਗੱਲ ਨੂੰ। ਕਿਹਾਤਾ ਜਵਾਬ ਦੇ ਵੀ ਦੂਜਾ ਹੈ। ਦੂਜਾ ਕਦ ਸ਼ਾਦਾ ਜਵਾਬ ਦੇ। ਕਿਹਾਤਾ ਜਵਾਬ ਲੱਭ ਲੈਣ। ਨਾਲ ਗੁਰੂ ਗੁਰੂ ਪਰੌਣ ਵਾਲੇ। ਜਵਾਬ ਲੱਭ ਲੈਣ ਉਸਦੀ ਗੱਲ ਦਾ ਇਹ ਗੁਰਬਾਣੀ ਝੂਠੀ ਹੈ। ਫਿਰ। ਉਹਦਾ ਜਵਾਬ ਦੇਣਾ ਗੁਰਬਾਣੀ ਗਲਤ ਲਿਖੀ ਹੈ। ਇਹ ਉਹਦੇ ਅਰਥ ਸਾਨੂੰ ਸਮਝਾਉਣ ਦੇ ਹੱਥ ਕੀ ਨੇ? ਨਾਨਕ ਇੱਕੋ ਪਸਰਿਆ ਕੋਈ ਬਹੁਤੀ ਔਖੀ ਗੱਲ ਨਹੀਂ ਪਾਛਾ ਤੇ ਵਿੱਚ ਕੋਈ ਫਰਕ ਨਹੀਂ ਸਪਸ਼ਟ ਗੱਲ ਸਿੱਧੀ ਕਹੀ ਹੈ ਦੂਜਾ ਕਹੇ ਤੇ ਦੂਜਾ ਕਿੱਥੇ ਆ ਜਿਹੜਾ ਨਜ਼ਰ ਆਉਂਦਾ ਹੋਵੇ ਜਿਹੜਾ ਉਹਦਾ ਦੱਸ ਦੇ ਦੂਜਾ ਤਾਂ ਹੀ ਕਹਤੇ ਕੋਈ ਨਾਲ ਹਟਵਾ ਪ੍ਰਚਾਰ ਕਰਦੇ ਤੇ ਦੂਜੇ ਦਾ ਉਹਨਾਂ ਦੇ ਮਾਰਿਆ ਤਲਵਾਰ ਦੂਆ ਪ੍ਰਚਾਰ ਹੋਏ ਨਹੀਂ ਸਕਦਾ ਕੋਈ ਪ੍ਰਚਾਰ ਹੋ ਸਕਦਾ ਦੂਜਾ ਕਹਿ ਵਿਚਾਰ ਆਪ ਕਹਤੈ ਸੋ ਸੁਣਨੇ ਹਾਰ ਇਹ ਤਾਂ ਬੰਦੇ ਵੀ ਗੁਰੂ ਤਾਂ ਗੁਰੂ ਬਣੇ ਬੈਠੇ ਨੇ ਨਾ ਵੱਲ ਵੀ ਗੁਰੂ ਬਣੇ ਬੈਠਾ ਜਦਦਾ ਸ੍ਰੀ ਚੰਦ ਵੀ ਗੁਰੂ ਬਣੇ ਬੈਠਾ ਕਹਿੰਦਾ ਆਪ ਕਹਤੈ ਆਪ ਸੁਣਨੇ ਕੋਣ ਕੰਨ ਵਾਲਾ ਵੀ ਆਪ ਹੈ ਸੁਣ ਵਾਲਾ ਵੀ ਆਪ ਹੈ ਕਿਲਾ ਹੁਣ ਕਿਥੋਂ ਆ ਗਏ ਸੁਣਦਾ ਵੀ ਬੋਲਦਾ ਬੋਲਦਾ ਬੋਲਣ ਵਾਲਾ ਵੀ ਬੋਲਦਾ ਕੋਈ ਬੁਲਾਉਂਦਾ ਤਾਂ ਬੋਲਦਾ ਉਹ ਜੋ ਕਹਿੰਦਾ ਨਾ ਜਲੇ ਬੋਲਦਾ ਇਹ ਸੁਣਦਾ ਫਰਕ ਤਾਂ ਹੋਇਆ ਉਹ ਕਹਿੰਦਾ ਬੁਲਾਉਣ ਵਾਲਾ ਬਣਿਆ ਇਹਨੂੰ ਬੁਲਾ ਰਿਹਾ ਜੇ ਇਹਨੂੰ ਬੁਲਾ ਦੂਗਾ ਜੇ ਬਲਾਇਰੂ ਬਲਾਦ ਜੇਰੂ ਬੱਜੀ ਬਲਾਦ ਤੇ ਉਹਦੀ ਮਰਜ਼ੀ ਹੋਈ ਨਾ ਕਿਛੇ ਬੁਲਾਉਣ ਵਾਲਾ ਬਲਿਆ ਫਿਰ ਇਹਦਾ ਦੋ ਬਰਾਬਰ ਨੇ ਇਹਦਾ ਆਪੇ ਲਫ਼ਜ਼ ਵਰਤੇ ਐਸੇ ਤੇ ਵੀ ਨਹੀਂ ਕਹਵੇ ਕਹਦਾ ਦੂਆ ਸੁਣਦਾ ਐਵੇਂ ਹੀ ਗਿਆ ਐਵੇਂ ਹੀ ਗਿਆ ਪੰਜਾਬ ਸੁਣਦੇ ਦੂਜਾ ਸੁਣਦਾ ਦੇਵਨੀ ਕੇ ਹੈ ਸਤਾਂ ਆਪ ਆਪੇ ਲਫ਼ਜ਼ ਵਰਤਦਾ ਉਹੀ ਸੁਣਦਾ ਆਪੇ ਹੀ ਸੁਣਦਾ ਆਪੇ ਹੀ ਕਥਨ ਕਰਦਾ ਦੂਜਾ ਕਥੋਂ ਆਵੜਿਆ ਉਹ ਨਾ ਦੂਜਾ ਕਹਦੇ ਸਾਰ ਦੂਜਾ ਵਰਦਾ ਕਹਿੰਦਾ ਆਖ ਫਿਰ ਦੂਜਾ ਫੜ ਗਿਆ ਹਾਂਜੀ ਆਪ ਕਹੇ ਆਪ ਸੁਣਨੇ ਹਾਰ ਆਪ ਇੱਕ ਆਪੇ ਇੱਕ ਆਪ ਵਿਸਥਾਰ ਆਪੇ ਇੱਕ ਆਪੇ ਵਿਸਥਾਰ ਸਾਰਿਆਂ ਦੇ ਕੋਈ ਹੈ ਵਿਸਾਰ ਵੀ एक ते भए ओ श्लोक जी जंत के ठागरा आपे बर्तन हार नानक इक ओ पसरिया दूजा कै दृष्टा जी जंत के ठागरा कौन है पूर्ण प्रभु ओ सारे पूर्ण प्रभु ने एक वचन बंदी दा हुंदा है रु अने कहा बरे था जी जंत के ठाग अंदे खुद दे ਇਸ ਕਰੀਕੂ ਕਿੱਕ ਕਰਕੇ ਜੁਦੂਣ ਹੋਈਏ ਸਰਕਾਰ ਕੇ ਜੁਦੂਣ ਇੱਕ ਕੋਣ ਉਹਨਾਂ ਦਾ ਦੇਖੋ ਦੂਆ ਉੱਥੇ ਹੁੰਦਾ ਜਿੱਥੇ ਮੱਤ ਪੇਦੋਗੀ ਜਿੱਥੇ ਮੱਤ ਪੇਦੋ ਜਿੱਥੇ ਦੂਆ ਕਰਮੀ ਜਿੱਥੇ ਮੱਤ ਤੇ ਇਹੋ ਜਿਹਾ ਦੂਆ ਉੱਥੇ ਹੋਊਗਾ ਜੇ ਮੱਤ ਹੈ ਤੇ ਦੂਆ ਖੜੂਗਾ ਉੱਥੇ ਤਾਂ ਤਾਕਤ ਵਧੂ ਇੱਕ ਦੀ ਦਾ ਦੂਆ ਨਾ ਵੀ ਆ ਕੇ ਬੋਰਡ ਦੇ ਦੇਣੀ ਉਸੇ ਨੂੰ ਵੀ ਇਹ ਠੀਕ ਹੈ ਬਿਲਕੁਲ ਹੋ ਇਹ ਠੀਕ ਹੈ ਦੂਆ ਦਾ ਉਹ ਵੀ 22.5 ਕਰਦੇ ਨੇ ਆ ਦੋਨੇ ਇਹ ਠਾਗਰਾ ਹੈ ਠਾਗਰਾ ਤੇ ਹੈ ਜੀ ਠਾਗਰਾ ਆਪੇ ਦਾ ਕਹਿੰਦਾ ਆਪੇ ਦਾ ਦੂਜਾ ਕਹਿ ਦ੍ਰਿਸ਼ਤਾ ਨਾਨਕ ਇੱਕੋ ਪਸਾਰਿਆ ਇੱਕੋ ਪਸਾਰਿਆ ਸੰਸਾਰ ਦੇ ਵਿੱਚ ਉਹ ਵਿ੍ਰੱਤ ਦਾ ਹੀ ਪਸਾਰਾ ਸਭ ਦਾ ਨਾਨਕ ਬ੍ਰਹਮ ਪਸਾਰਾ ਸਾਰਾ ਸਾਰਾ ਪਸਾਰਾ ਹੀ ਬ੍ਰਹਮ ਦਾ ਇੱਕੋ ਪਸਾਰਿਆ ਬ੍ਰਹਮ ਪਸਾਰਿਆ ਬ੍ਰਹਮ ਵੀ ਕੋਈ ਬੋਲਦੇ ਲਾਗਦੇ ਆਗੇ ਡਿਫਰੈਂਸ ਨਹੀਂ ਹਾਦੇ ਕੋਈ ਨਹੀਂ ਹਾਦੇ ਨਾ ਹਰ ਕਰਕੇ ਆਪ ਆਪਣੀ ਬੁੱਤ ਬੁੱਤ ਆਰਮਾਨ ਕਰਕੇ ਅਸੀਂ ਅਲੱਗ-ਅਲੱਗ ਹੁਣ ਕਰ ਆਰਮਾਨ ਕਰਕੇ ਅਲੱਗ-ਅਲੱਗ ਨਹੀਂ ਆਗੇ ਨਾਲ ਕ ਇੱਕੋ ਪਥਰ ਹੈ ਇੱਕ ਦਾ ਪਸਾਰਾ ਸਿਰ ਦੂਜਾ ਕ ਦ੍ਰਿਸ਼ਾ ਸੰਸਾਰ ਚ ਵੀ ਉਸੇ ਦਾ ਪਸਾਰਾ ਨਰਾਕਾਲ ਦੇ ਕਸ਼ੀ ਕੋਇ ਹੈ ਕੋਈ ਦੂਜਾ ਕਥਾ ਜੀ ਨਾ ਦੱਸੋ ਬਥੇ ਦੂਜਾ ਕਹ ਤੇਹ ਦੂਜਾ ਪਿਛਾਰ ਜਿਹਨੂੰ ਦੀਨਾ ਦੱਸੇ ਕੋਈ ਦੇਸ਼ੀਮਾਂ ਦੂਜਾ ਨਹੀਂ ਹਰੇ ਤੇ ਹਾਂ ਲੋਕ ਕਿਨਾ ਬਰ ਲੋਕ ਲੋਕ ਦੇ ਵਿੱਚ ਬਿਮਾਰ ਹੈ ਬ੍ਰਹਮਾ ਇੱਕ ਉਹ ਮਾਰਨਾ ਮਰੀਜ਼ ਨੇ ਹੈ ਉਹੀ ਬੰਦਾ ਬਿਮਾਰ ਹੈ ਉਸੇ ਸੰਤੁਸ਼ਟ ਨੇ ਦੂਜਾ ਕਹਿੰਦੇ ਤੇ ਜੇ ਬਰੀਜ ਹੈ ਤਾਂ ਵੀ ਆਦਮੀ ਹੈ ਜੇ ਡਾਕਟਰ ਹੈ ਤਾਂ ਵੀ ਆਦਮੀ ਹੈ ਦੂਜਾ ਕਹੌਣ ਲੇ ਜਿੱਦ ਕੋਈ ਨਹੀਂ ਬ੍ਰਹਮਿਕਾ ਬ੍ਰਹਮਿਕਾ ਹੈ ਬ੍ਰਹਮ ਇਹ ਲੋਕ ਹੈ ਕੋ ਬਿਮਾਰ ਹੈ ਪਰ ਡਿਫੈਕਟਿਵ ਹੈ ਉਹਨਾਂ ਦਾ ਬ੍ਰਹਮ ਜਿਹੜਾ ਹੈ ਕੁਝ ਵੀ ਮੰਨਣ ਪਰਮ ਨੂੰ ਸਾਡਾ ਬ੍ਰਹਮ ਅਧਾ ਹੈ ਸਾਡੇ ਕੋਲ ਬ੍ਰਹਮ ਅਧਾ ਡਿਫੈਕਟਡ ਹੈ ਲੋਕਿਓ ਬ੍ਰਹਮ ਆਪਰ ਬੰਮਾ ਬਕਰੀ ਜਦੋਂ ਨਾ ਦੀ ਪੂਰਨ ਬ੍ਰਹਮਾਇਲ ਬਾਰਦਨ ਦਾ ਬਾਤ ਵੀ ਕਰਦਾ ਉਹਨਾਂ ਬ੍ਰਹਮ ਅਪੂਰਨ ਬ੍ਰਹਮ ਜਿਹੜਾ ਅਪੂਰਨ ਬ੍ਰਹਮ ਹੈ ਪੂਰਨ ਨਹੀਂ ਹੈ ਉਹ ਐਸ ਲੋਕ ਵਿੱਚ ਪੂਰਨ ਹੋਣ ਵਾਸਤੇ ਆਇਆ ਹੋਇਆ ਉਸੇ ਨੂੰ ਪੂਰ ਰਿਹਾ ਪੂਰਿਆ ਜਾ ਰਿਹਾ ਹੈ ਪੂਰ ਰਿਓ ਸਰਬਤਰਮਾ ਹੈ ਸਰਬਤਰਮਾ ਹੈ ਜੋ ਬ੍ਰਹਮਾ ਨੂੰ ਪੂਰ ਰਿਹਾ ਹੈ ਕੌਣ ਪੂਰ ਬ੍ਰਹਮ ਜਿਹੜਾ ਹਰ ਨਾਨਕ ਇੱਕੋ ਦੂਜਾ ਕਹਿ ਦਿਸਾਰਿਆਂ ਦੇ ਵਰਤ ਹੈ ਤੂੰ ਸਾਰਿਆਂ ਚੰਤਰਾ ਤੋਂ ਇਹ ਆਵਾਜ਼ ਤੇਰੀ ਹੈ ਸਿੱਖਿਆ ਦੇ ਰਹਿ ਜੜੀ ਸਾਰਿਆਂ ਦਾ ਤਰਭੋ ਗਿਆ ਤੂੰ ਸਭ ਕੋ ਵਸ ਸਮਹਾਰ ਨਾਨਕ ਇੱਕੋ ਬਸ ਰਿਆ ਦੂਜਾ ਕਹਿ ਦਿਸਦਾ ਨਾਨਕ ਇੱਕੋ ਬਸ ਰਿਆ ਕੋਈ ਨਾ ਤਸਾਰਾ ਸਾਰੇ ਦੂਜਾ ਦੂਜਾ ਕਦੇ ਨਹੀਂ ਦੱਸੇ ਹੈ ਤੇ ਤੂੰ ਆਦ ਕਿੱਥੋਂ ਆ ਗਈ ਫਿਰ ਤੇ ਸਿੱਖ ਬੁਲੰਦ ਕਿੱਥੋਂ ਆ ਗਿਆ ਤੇਰੀ ਮেরি ਕਿੱਥੋਂ ਆ ਗਈ दोए किथों आ गई आए दी सब्जी एक कोई पसरया इत्ते आके एटा तो एक ता गिनती के शुरू होगी माया छ माया तारियां दे आंकड़े बनाए होदे कोई जड़दे विच तो ता एक दो गिनती हो खत्म इत्ते तो आंदे कुछ नहीं नान के एको एक पसरया ਦੂਜਾ ਕਹੇ ਸਾਰੇ ਜੀ ਸੰਤ ਵਿੱਚ ਕੋ ਫਿਰਿਆ ਹੋਇਆ ਦੂਜਾ ਕਹਿਆ ਕਿ ਤੇ ਅੂਜਾ ਦਸੂ ਸੇ ਸਟਾਰਟ ਜਿਹੜਾ ਦਿਨ ਹੋਵੇ ਪ੍ਰਗਟ ਹੋ ਕੇ ਦਿਖਾਉਗੇ ਤੇ ਚੈਲੈਂਜ ਹੈ ਸਾਰਿਆਂ ਨੂੰ ਸਾਰਿਆਂ ਪਤਾ ਫਿਰ ਨੇ ਜਿਹਨੂੰ ਦਿਂਦਾ ਉਹਨੂੰ ਦੱਸਦਾ ਜਿਹੜਾ ਦੂਜਾ ਕਹਿੰਦਾ ਦਿਖਾ ਦੇ ਫਿਰ ਦੂਜਾ ਕੋਈ ਦਸ ਬੰਦੇ ਲਿਆ ਬੋਲਦੇ ਫਿਰ ਬੰਦੇ ਨਾ ਦਸਰਿਆ ਨਮੋਦ ਦੇ ਹਾਂਜੀ ਅਸ਼ਟਪਦੀ ਆਪ ਕਥੇ ਆਪ ਸੁਣ ਲੈ ਹਾਂ ਆਪੇ ਇੱਕ ਆਪ ਵਿਸਥਾਰ ਦੂਜਾ ਕਹ ਲੈ ਸਤਾਰ ਜਿਹੜਾ ਦੂਜਾ ਕਹਿਣ ਸੁਣ ਕੋ ਦੂਜਾ ਜਿਹੜਾ ਸ਼ੈਤਾਨ ਦੂਜਾ ਮੰਨ ਲਿਆ ਨ ਉਹ ਵੀ ਕਹਿਣ ਸੁਣਾ ਅਸਲ ਸ਼ੈਤਾਨ ਵੀ ਹੈ ਬਹਾਰ ਹੈ ਬਿਮਾਰ ਕਰਕੇ ਤੁਂਜਾ ਲੱਗਦਾ ਇੱਕ ਡਾਕਟਰ ਆ ਕਮਰੀਜ ਆ ਦੋ ਲੱਗਦੇ ਤੂੰ ਸਾਦੂ ਇੱਕ ਡਾਕਟਰ ਕਮਰੀਜ ਆ ਲੱਗਦੇ ਦੋ ਨੇ ਇੱਕ ਦਾ ਇਲਾਜ ਹੋ ਰਿਹਾ ਹੈ ਕਲਾਜ ਕਰ ਰਿਹਾ ਲੱਗਦੇ ਦੋ ਨੇ ਬੀਸਿਕਲੀ ਤਾਂ ਕੋਈ ਨਹੀਂ ਜਦੋਂ ਇਹ ਤੰਦਰੁਸਤ ਹੋ ਗਿਆ ਭਈ ਉਦੋਂ ਫਿਰ ਕੀ ਹੋ ਇਹਨੇ ਦਵਾਈ ਖਾਦੇ ਖਾਦੇ ਨੇ ਆਜ ਕਰਾਉਂਦੇ ਕਰਾਉਂਦੇ ਡਾਕਟਰ ਬਣ ਜਾਣਾ ਸਾਰੇ ਬੇਦੋਯਾਂ ਨੂੰ ਦਾਰਸ਼ਨੀ ਕੀ ਹੁੰਦੀ ਹੈ ਦਾਰਸ਼ਨੀ ਦਾ ਇਹ ਨਹੀਂ ਹੋ ਰਹੀ ਹੈ ਇਹ ਐਵੇਂ ਇਸ ਕਰਕੇ ਉਹ ਨਾਜਰ ਲੱਗਦਾ ਜਾਂ ਨજર ਬਿਮਾਰ ਹੈ ਦੂਜਾ ਇਹ ਰੂਪ ਦੂਜਾ ਦਾ ਜੇ ਕੋਈ ਨਹੀਂ ਹੈਗਾ ਬਹੁਤਾ ਫਰਕ ਨਹੀਂ ਹੈਗਾ ਬਿਮਾਰ ਦਾ ਤੰਦਰੁਸਤ ਹੁੰਦਾ ਦੱਸਦਾ ਸੋ